ਸ਼ੇ ਲੋਕ ਮਹੱਲਾ ਤੀਜਾ ਗੁਰਮੁਖੀ ਸੇਵਨਾ ਕੀਨੀਆ ਹਰ ਨਾਮ ਨਾਲ ਲੱਗੋ ਪਿਆਰ ਸ਼ਬਦੈ ਸਵਾਦ ਨਾਲ ਆਇਓ ਮਰ ਜਨਮੈ ਬਾਰ ਗੁਰਮੁਖ ਹੋਏ ਦੇਗਿਜੇ ਭਗਤ ਹੋਏ ਦੇ ਨੇ ਕੀ ਸੇਵਾ ਕੀਤੀ ਹੈ ਉਹਾਂ ਨੇ ਸਤਿਕਾਰ ਨੂੰ ਸੁਖਤੀ ਦਾ ਮਾਰਗ ਦੱਸਿਆ ਛੁਟਕਾਰੇ ਦਾ ਮਾਰਗ ਆਗੇ ਅਦਨ ਸਾਗਰ ਹੈ ਨਾ ਪਵ ਸਾਗਰ ਹੈ ਜੋ ਬਾਹਰ ਚੱਕਦਾ ਕੀ ਅਜ ਦਿਆ ਜਾਣੇ ਕਰੇ ਨੇ ਜੀ ਨੂੰ ਦਾਨ ਦਿੱਤਾ ਪਰਦ ਤੇ ਬਣਾ ਲਿਆ ਸਰੀਰ ਨੂੰ ਕੰਮ ਦਾ ਦਾਨ ਸਰੀਰ ਦੇ ਕੰਮ ਦਾ ਆਉਣ ਵਾਲਾ ਕੋਈ ਦਾਨ ਦਾਨ ਨਹੀਂ ਬਚਿਆ ਕੋਰਬਾਨੀ ਦਿਆ ਜਾਣੇ ਜੀ ਕੀ ਸੱਚ ਪੁਨਰਦਾਨ ਕਰੇ ਪੁਨਰਦਾਨ ਕੀ ਹੈ ਸਾਡਾ ਦਾਨ ਕੀ ਹੈ ਸਾਡਾ ਮਖਾਣਾ ਕੀ ਹੈ ਗੁਰਪਖੀ ਨਾਮ ਦਾਤਿ ਇਸ ਨਾਮ ਆ ਜਿਹੜਾ ਸੰਸਾਰੀ ਪਦਾਰਥ ਨੇ ਇਹ ਦਾਨ ਨਹੀਂ ਦੇ ਸਕਦੇ ਤਾਂ ਸਾਡੇ ਹੈ ਹੀ ਨਹੀਂ ਤਾਂ ਕਿਸੇ ਦੇ ذریعے ਸ਼ਬਦ ਦੇ ਸਵਾਦ ਆਇਓ ਮਰ ਜਨਮੇ ਵਾਰੋ ਵਾਰ ਪਰਮਾਗਰ ਸਤਪੁਰ ਕੋਈ ਗੱਲ ਹੈ ਆ ਗੁਰਮੁਖ ਕਾਹੇ ਗੁਰੂਆਂ ਤੇ ਗੁਰਮਖੇ ਕਾਹੇ ਗੁਰਮੁਖੀ ਨਾਮ ਦਾ ਹਾਜੀ ਗੁਰਮੁਖ ਘੋਟੇ ਕਰੇ ਪਛਾਣ ਗੁਰਮੁਖ ਚੁੱਕੇ ਆਉਣ ਗਿਆਨ ਗੁਰਮਖ ਲਾਗੇ ਰਹੇ ਨੇ ਸ਼ਬਦ ਉਹ ਵਾਸਤੇ ਪਹਿਲਾਂ ਦੋ ਜਗਾਂ ਦਾ ਸਤਪੁਰ ਕੀ ਸੇਵਨਾ ਕੀਤੀ ਸੇਵਨਾ ਕੀਤੀ ਠੀਕ ਗੱਲ ਹੈ ਇੱਕ ਗੱਲ ਹੈ ਠੀਕ ਹੈ ਜੀ ਗੁਰਮੁਖ ਦੇ ਦਾ ਸ਼ਬਦ ਹੈ ਸਰਪੀਕ ਠੀਕ ਹੈ ਕਿਉਂਕਿ ਇਹਦੇ ਵਿੱਚ ਫਿਰ ਹੁਣ ਅਗਲੀ ਲਾਈਨ ਚ ਹੈ ਮਨਮੁਖੀ ਅੰਧ ਨਾ ਚੇਤੀ ਕਿਤ ਆਇਆ ਸੰਸਾਰ ਨਾਨਕ ਜਿਨ ਕੋ ਨਦ ਕਰੇ ਸੇ ਗੁਰਮੁਖ ਲੰਗੇ ਪਾਰ ਹਾਲ ਗੁਰਮੁਗਾਨੀ ਦੇਵਾਨੀ ਕੀਤੀ ਔਰ ਸ਼ਬਦ ਦੇ ਨਾਲ ਜਿਹੜਾ ਗੁਰੂ ਗੁਰਬਾਣੀ ਦਾ ਜਿਹਦਾ ਪਿਆਰ ਨਹੀਂ ਜੁੜਿਆ ਫਸ ਬਰੋ ਗਿਆ ਮਰ ਜਲ ਮਨਜਨ ਮੈਂ ਵੰਦਨਾ ਕੀਤੀ ਉਹ ਸਾਧਨਾ ਆਇਆ ਪਰ ਜੱਬੇ ਪਾਰੋ ਬਾਤ ਉਹ ਜੱਬੂਲ ਵਤ ਪਏ ਰਹਿੰਦੇ ਨੇ ਇੱਥੇ ਮਨ ਮੁਖ ਅੰਦਨਾ ਜੇਤਿਲੇ ਮਨ ਮੁਖ ਨੇ ਲੋ ਉਹ ਤਾਂ ਹੋਈ ਤਾਇਆ ਸੰਸਾਰ ਨੂੰ ਪੁੱਛਿਆ ਵੀ ਤੂੰ ਸੁਖ ਫਿਰ ਭਾਈ ਕੀ ਕਰ ਰਿਹਾ ਜੇ ਤੈਨਂ ਉਹਨੇ ਜੀ ਆਂ ਚਲ ਬਣ ਆਇਆ ਆਤਮਾ ਦੀ ਬਾਤ ਅਰੰਭ ਕੀਤੀ ਹੈ। ਬਦ ਪਾਣੀ ਧੋਲਾ ਦਾ ਸਰੀਰ ਦੇ ਖਾਦਾ। ਇਹਨੂੰ ਦੀ ਖੁਰਾਕ ਦਾ ਸਰੀਰ ਦੀ ਖੁਰਾਕ ਦੇ ਅੰਤਰ ਦਾ ਹੀ ਨਹੀਂ ਪਤਾ। ਉਹ ਠਿੱਕੀ ਤਾਂ ਸ਼ੁਰੂ ਹੁੰਦੀ ਹੈ। ਆਤਮਾ ਦੀ ਖੁਰਾਕ ਹੈ ਗੁਰਬਾਣੀ ਜੀ। ਸਰੀਰ ਦੀ ਖੁਰਾਕ ਤਾਂ ਬਾਹਰ ਹੈ। ਠੀਕ ਹੈ ਜੀ। ਇੱਥੇ ਸੰਸਾਰ ਅੱਖਰ ਦਾਲਾਵਾਂ ਲਾ ਕੇ ਲਿਖਿਆ ਹੋਇਆ ਸੰਸਾਰ ਐ ਸਾਧਰ ਰਹਿਦਾ ਅਸ ਸਹਿਜੇ ਤੋਂ ਸਹਿਸਾਰ ਬਣੇ ਅੱਛਾ ਜੀ ਐ ਸਾਧਰ ਸੰਸਾਰ ਉੱਤੇ ਜਿੱਤੇ ਸ਼ੰਕਾ ਭਰਮ ਦਾ ਸਾਗਰ ਜਿੱਤੇ ਭਰਮ ਉੱਤੇ ਪਾਇਆ ਗੱਲ ਇੱਕੋ ਹੀ ਹੈ ਠੀਕ ਹੈ ਜੀ ਨਾਨਕ ਜਿਨ ਕੋ ਨਜ਼ਰ ਕਰੇ ਤੇ ਗੁਰਮੁਖ ਲੰਘੇ ਪਾਰ ਬੁਹਾ ਮੁਖ ਦਾ ਅੰਦੇਰੇ ਇਹਨਾਂ ਦਾ ਜੇਤਨ ਜੇਤਨ ਦੇ ਉੱਤੇ ਸਮਝਦੇ ਨਹੀਂ ਬਿਖਿਆ ਕੋਈ ਸੰਸਾਰੀਨ ਤੱਕ ਦੇ ਬਚਾਰੇ ਆਈ ਦੀ ਇਹ ਕਿ ਬਚਾ ਨਾ ਤਾਂ ਜੇਤਨ ਜਾਗ ਤੇ ਲੈਲ ਬਹਿਣੀ ਇਹਨਾਂ ਦੇ ਤਲ ਨਾਨਕ ਜੇਦ ਕੋ ਨਜ਼ਰ ਕਰੇ ਗੁਰਮੁਖ ਲੰਦੇ ਪਾਰ ਜਿਹੜਾ ਤੇ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ ਕੋਈ ਇਹ ਰੱਤਾ ਬਣੂਦੇ ਨੇ ਉਹੀ ਗੁਰ ਬਣਦੇ ਨੇ ਕੋਈ ਗੁਰਬਾ ਬਦਦੇ ਦੇ ਗੁਰਬਾਨੀ ਇਨਸਾਰ ਚਲਦੇ ਨੇ ਆਪਣੇ ਤੋਂ ਬਦਲਦੇ ਨੇ ਔਰ ਭਗਸਾਦਰ ਤੋਂ ਪਾਲ ਲੱਗ ਠੀਕ ਹੈ ਜੀ ਮਹੱਲਾ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤਗੁਰ ਸੇਵਨ ਜਾਗਨ ਸੇ ਜੋ ਰੱਤੇ ਸਤ ਨਾਮ ਗੁਣਤਾ ਵਾਲੇ ਨੂੰ ਕਿਹਾ ਸੀ ਨਾ ਕਬੀਰ ਨੇ ਫੂਲ ਨਹੀਂ ਵਾਲਣੀ ਆ ਜਾਗਤਾ ਹੈ ਦਿਓ ਹਾਂਜੀ ਉਹੀ ਗੱਲ ਕਹਿ ਰਹੇ ਨੇ ਆਲੀ ਵਾਲਿਓ ਇੱਕੋ ਸਤਗੁਰ ਜਾਗਤਾ ਤੇ ਖਾਲੀ ਕੋਈ ਨਹੀਂ ਇਹ ਵੀ ਹੈ ਫਿਰ ਕੌਣ ਹੋਇਆ ਸਤਗੁਰ ਬਈ ਸਵਾਲੇ ਹੋ ਗਿਆ ਉਹ ਜਿਹੜਾ ਸਾਲ ਐਦਾ ਉਹ ਸਤਗੁਰ ਐ ਉਹ ਨਹੀਂ ਜੇ ਸੌਂ ਗਿਆ ਉਹ ਸਾਲੇ ਫਿਰ ਉਹ ਜਿੱਦਾਂ ਸੌਂਦਾ ਫਿਰ ਲੱਬੇ ਕੋੜ ਪਸਾਰੇ ਸੌਂਦਾ ਉਹ ਸੁਦੇ ਮੁਸਦ ਹੋ ਜਾਂਦਾ ਬਸ ਫਿਰ ਉਹ ਲਾਸ਼ੇ ਰਹਿ ਜਾਂਦੀ ਹੈ ਇਕੋ ਸਤਗੁਰ ਜਾਗਤਾ ਹੋਰ ਜਗ ਜਗ ਦੀ ਗੱਲ ਆ ਸਿਰਫ ਇਹ ਹਾਂ ਹਾਂ ਸਤਨ ਦੀ ਗੱਲ ਨਹੀਂ ਆ ਦੁਆਪਰ ਦੀ ਆ ਗੱਲ ਨਹੀਂ ਕੱਲੀ ਕਲਯੁਗ ਦੀ ਗੱਲ ਆ ਇੱਥੇ ਜਗ ਆ ਗਿਆ ਨਾ ਲੱਭੋ ਜਗ ਸੂਤਾ ਉਹ ਪਿਆਸ ਉਹ আর ਤ੍ਰਿਸ਼ਨਾ ਮਾਇਆ ਦੀ ਇੱਥੇ ਹੀ ਐਸ ਸੰਸਾਰ ਚ ਦੁਆਪਰ ਕਰਦੇ ਚਾਹੀਦੀ ਹੈ ਨੂੰ ਮੁਕਤੀ ਦੇਣੇ ਇਕੋ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਮੋੜਾ ਜਦ ਹੋਰ ਮੋ ਪਿਆ ਸੁੱਤਾ ਹੈ ਜਗ ਇੱਕ ਸਤਗੁਰ ਰਹਿਣਾ ਜਾਗਦਾ ਹੈ ਦਿਓ ਕੋਈ ਦੇਵ ਅੰਤਰ ਦੇਵ ਨਾ ਜਾਣੇ ਜਾਗਦਾ ਹਰ ਵਕਤ ਇਹ ਅੰਦੇ ਸੇਵਣ ਜਾਗਣ ਸੇ ਤੇ ਸਤਗੁਰ ਦੀ ਸੇਵਾ ਕਰਦੇ ਸੇਵ ਕਰਦੇ ਕਾਤਗੁਰ ਦੀ ਸੇਵ ਕੀ ਹੈ ਜੋ ਅਸੀ ਗੁਰਬਾਣੀ ਦੇ ਵਿੱਚੋਂ ਸਮਝਦੇ ਆ ਨਾ ਗਿਆਨ ਨੂੰ ਇਤਾਂ ਜੋ ਸਾਨੂੰ ਮਿਲਦਾ ਹੈ ਗਿਆਨ ਇਹ ਉਹਦੀ ਖੁਰਾਕ ਹੈ ਸਤਗੁਰ ਦੀ। ਦ੍ਰਗ ਗਿਆਨ ਦੀ ਖੋਜ ਹੈ ਨਾ। ਗਿਆਨ ਇਹ ਗਿਆਨ ਉਹਦਾ ਭੋਜਨ ਹੈ ਨਾ। ਮੰਨਦਾ ਨਹੀਂ ਉਹ ਸੰਦ ਭੋਜਨ ਦਾ ਸਰੀਰ ਵਾਲਾ ਹੈ। ਪਾਇਆ ਇਹ ਜਿਹੜੇ ਸ਼ਬਦ ਵਿਚਾਰ ਕਰਦੇ ਨੇ ਸਤਗੁਰ ਦੀ ਸੇਵਾ। ਕਹਿੰਦੇ ਗੁਰसेवा, ਸੇਵਾ ਗੁਰ ਸ਼ਬਦ ਵਿਚਾਰ। ਸ਼ਬਦ ਵਿਚਾਰ ਤੋਂ ਜੋ ਗਿਆਨ ਮਿਲਦਾ ਭੋਜਨ ਅੰਦਰਲੇ ਦਾ ਉਹ ਜਿਹੜਾ ਜਾਗਦਾ ਹੈ ਦਿਓ। ਠੀਕ ਉਹਦੇ ਗਿਆਨ ਤੇ ਵੱਧਦਾ ਉਹਦੀ ਉਹਦੀ ਬੁੱਧ ਵੱਲ ਵੱਧਦਾ ਉਹਦੀ ਸ਼ਕਤੀ ਵੱਧਦੀ ਹੈ ਬੰਦੀ ਜਗਤੀ ਘੜਦੀ ਹੈ ਉਹਦੀ ਸ਼ਕਤੀ ਵੱਧਦੀ ਹੈ ਤਾ ਮੰਹਾਰ ਹਰਮਤ ਦੀ ਗੁਰਬਾਣੀ ਦਿੰਦਾ ਮਨ ਹਰਾਉਣ ਵਾਲੀ ਚੀਜ਼ ਹੈ ਗੁਰਦੇ ਖਲਾਸ ਹੈ ਗੁਰਬਾਣੀ ਅੱਜ ਨਾਮ ਗੁਣਤਾਸ ਜਿਹੜਾ ਰੰਗ ਗੜ ਗਿਆ ਸੱਚ ਦਾ ਨਾਮ ਦਾ ਗੁਣੇ ਹੋ ਰਹੇ ਨੇ ਉਹਨਾਂ ਆਉ ਉਹ ਜਿਹੜੇ ਇੱਕ ਦੇ ਗੁਣ ਹੈ ਨਾ ਕਰਤਾ ਕਲਮ ਕਰਤਾ ਪੁਰਖ ਮੇਰ ਕੋ ਮੇਰ ਮੈ ਕਾਲ ਮੂਰਤਿ ਜੁਤੀ ਸਵਾਇ ਕਭ ਲੋ ਐ ਸਾਰੇ ਗੁਣ ਹੋ ਜਾਂਦੇ ਕੋਈ ਕੋਈ ਨਹੀਂ ਠੀਕ ਹੈ ਜੀ ਹੈ ਮਨ ਮੁਖ ਅੰਧ ਨ ਚੇਤਨੀ ਜਨਮ ਮਰ ਹੋਏ વિનાਸ਼ ਨਾਨਕ ਗੁਰਮੁਖ ਤੇਨੀ ਨਾਮ ਤੇ ਆਇਆ ਜਿੰਨ ਕੋ ਧੁਰ ਪੂਰਬ ਲਿਖਿਆ ਇਹਨਾਂ ਮੁਰਲੁਖ ਨੇ ਉਹਨਾਂ ਦੇ ਕੰਨੇ ਜਾਤ ਪਾਤ ਦੀ ਵੇਸ ਨੇ ਜੇਤਰਾ ਨੂੰ 20 ਡਿਗਲਾਂ ਹੈ ਚਾਹ ਨੂੰ ਵੀ ਹੈ ਠੀਕ ਹੈ ਆਪਾਂ ਲੋਕਾਂ ਨੂੰ ਉਹਨਾਂ ਨਾਲ ਕਰਿਓ ਪੁਰਤਾਨਾ ਨੂੰ ਖਰੇ ਹੋ ਬੁੱਜੀਏ ਜਨਮ ਬਰਿਆ ਹੋਏ ਬਨਾਸ ਉਹ ਜਨਮ ਦੇ ਮਰਦ ਨੇ ਬਨਾਸ ਹੋ ਜਾਂਦੇ ਨੇ ਬਨਾਸ ਹੁੰਦਾ ਰਹਿੰਦਾ ਉਹਨਾਂ ਦਾ ਨਾਨਕ ਗੁਰਮੁਖੀ ਜਿਨ੍ਹਾਂ ਨੇ ਤੁਰ ਤੋਂ ਲਿਖ ਕੇ ਆਏ ਤੇ ਨਵੀਂ ਐਦ ਕੀਏ ਕਿ ਬਾਜੀ ਜਿਤਨੀ ਉਹ ਜਿਤਨੀ ਜਨ ਪਦਾਰਥ ਜਿਤਨੀ ਜੱਟਣ ਉਹਨਾਂ ਨੇ ਇਹ ਕੰਮ ਕੀਤਾ ਇੱਥੇ ਆ ਕੇ ਜਿਹੜੇ ਪੱਕਾ ਨਹੀਂ ਸੀ ਲਿਖ ਕੇ ਲੈ ਕਟਿਆ ਸੀ ਮਿਟ ਗਿਆ ਉਹਨਰ ਦਾ ਫਿਰ ਕਿਆਗਨਾਂ ਲਿਖਿਆ ਹੋਇਆ ਸੀ ਇਹ ਭੁੱਲ ਗਏ ਕਿ ਆਕੇ ਪਿੱਛੇ ਸੀ ਔਰ ਪੂਰਬ ਨੇ ਕਿਹਾ ਇਹਦੇ ਵੀ ਦਾ ਪੂਰਬੇ ਲਿਖਿਆ ਹੋਇਆ ਜਨਮ ਤੋਂ ਵੀ ਪੂਰਬ ਜਦ ਆਏ ਨੂੰ ਉਹ ਪੂਰਬ ਲਿਖ ਕੇ ਆਏ ਤੇ ਵੀ ਐਸੀ ਬਾਜੀ ਜਿੱਤ ਕੇ ਲੈਉਣੀ ਆ ਹਰਕੇ ਦੀ ਹੁਣ ਐਟ ਕੀਤੀ ਹੋਜੀ ਔੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ जितखाई है हमको त्रिपत भई हर नाम हमारा पहनन जित फिर नंगे न होवें और पहनन की हमारी पर्द गई देखो आप भोजन करता ना सेवा यही है कहले आप बेचारा ने ना मिलूंगा भोजन दे ये भोजन खाऊंगा ता फिर चगी होगी सेवा होगी के उन भोजन ने मिल सुखारो कब जरोडूगा तेरावाजूगा ठीक है नहीं नहीं नहीं ਆ ਭੋਜਨ 36 ਪ੍ਰਕਾਰ 36 ਪ੍ਰਕਾਰ 36 ਪ੍ਰਕਾਰ ਦੇ ਲੋਕਾਂ ਨੇ ਖੋਜਦੇ ਨਾ ਬਾਹਰਲੇ ਸਾਡਾ ਤਾਂ ਨਾ ਵੀ 36 ਪ੍ਰਕਾਰ ਦਾ ਭੋਜਨ ਪਾਰ ਤਾਂ ਉਹ ਨਾਲੇ ਗੁਜ਼ਾਰਾ ਹੋ ਬਾਹਰ ਛੱਡੋ ਤੁਸੀਂ ਉਹਦੇ ਖਾਦਾਂ ਨੂੰ ਟਾਈਮ ਵੇਸਟ ਕਰੋ ਜਿੰਨਾ ਵੀ ਹੋ ਸਕਦਾ ਸਵਾਸ ਸਵਾਸ ਇੱਧਰ ਲਾਓ ਜਿੱਤ ਖਾ ਖਾਈਏ ਹਮ ਕੋ ਕੀ ਬਤ ਭਾਈ ਜਿਹੜੇ ਪਦਾਰਥ ਖਾ ਕੇ ਗਰਮ ਖਾ ਕੇ ਅਸੀਂ ਤ੍ਰਿਪਤ ਰਹੇ ਹਾਂਗਾਏ ਤ੍ਰਿਪਤ ਹੋ ਗਏ ਭੁੱਖੇ ਹੀ ਰਹੀ ਕੋਈ ਆਂ ਰਾਤ ہمارا ਫਾਈਨਲ ਨਾ ਹੋਵੇ ਹੋਰ ਫਾਈਨਲ ਕੀ અમારી ਸਰਦ ਗਈ ਹੋਰ ਤਾਂ ਕੁਝ ਫਾਈਨਲ ਦੀ ਸਰਦਾ ਹੀ ਚਲੀ ਗਈ ਇੱਛਾ ਹੀ ਨਹੀਂ ਰਹੀ ਨਾ ਉਹ ਬੈਨkörper ਆਤਮਾ ਦੇ ਬੈਨ ਹਾਂਜੀ ਨਾ ਸਰੀਰ ਦਾ ਬੈਨ ਹੀ ਚਲ ਉਹ ਵਾਲੇ ਕੱਪੜਿਆਂ ਦੀ ਸਰਦਾਰੀ ਸਾਡੀ ਰਹੀ ਹੁਣ ਯਾ ਫੈਸ਼ਨ ਬਦਲ ਗਿਆ ਉਹ ਫੈਸ਼ਨ ਬਦਲ ਗਿਆ ਅੱਜ ਐਜਾ ਬਣ ਗਿਆ ਪਹਿਨ ਲਿਆ ਕੋਈ ਤਲਬਾਣਾ ਰੱਖਦੇ ਨੇ ਘਰ ਨੇ ਫੈਸ਼ਨ ਫੂਜਨ ਬਹੁਤ ਉਹਨਾਂ ਦਾ ਫੈਸ਼ਨ ਚ ਕੰਪੀਟੀਸ਼ਨ ਨੇ ਦੁਨੀਆ ਦੀ ਵਧਾਈ ਹੈ ਉਹਨੂੰ ਭੁੱਖ ਹੈ ਇਹਨੂੰ ਹਾਂਜੀ ਹਰ ਨਾਮ ਹਮਾਰਾ ਵਣਜ हर नाम व्यापार हर नाम है की हमको सतगुरु कारकुनी दी व्यापार करदे हां भी देना भी हर दम भी हमको सतगुरु कारकुनी भी सानू देता सैदी लाती कारगुरु उत्तक गन वाला भीतर ही ड्यूटी है भाई ये दुनिया नु ਕੈ ਦੂਤਾ ਦੇ ਤਾ ਹ ਕਿ ਜਲ ਕਾਂਹੀ ਭਰੋ ਕਹਿੰਦਾ ਤੇਰੀ ਡਿਊਟੀ ਐ ਜਦੋਂ ਜਿਹਨੂੰ ਲੋੜ ਹੋ ਉਹ ਲੈ ਲੂ ਜਿਹਨੂੰ ਰੀਲੋਡ ਲੋੜ ਲਵੇ ਪੂਰੀ ਹੋ ਜਿਹਨੂੰ ਰਹੀ ਘਣਾ ਸਹੀ ਹਾਂਜੀ ਹਰਨਾਮੇ ਕਾ ਲੇਖਾ ਲਿਖਿਆ ਸਭ ਜਮ ਅਗਲੀ ਕਾਂ ਗਈ ਆ ਲੇਖਾ ਕਾ ਲਿਖਿਆ ਪਹਿਲਾਂ ਦਾ ਅਸੀਂ ਲੇਖਾ ਲਿਖਦੇ ਤੇ ਮਾਇਆ ਕੋਈ ਤਾ ਵਪਾਪ ਕੀਤਾ ਉਹ ਨਾਮ ਦਾ ਲੇਖਿਆ ਵੀ ਹੁਕਮ ਦੇ ਬਿਨੂ ਦੀ ਕੁਝ ਸਾਡੇ ਹੱਥ ਚ ਨਹੀਂ ਇਹ ਲੇਖਾ ਲਿਖਤਾ ਹਾਂ ਜਾਡੇ ਦਾ ਹੱਥੇ ਦੀ ਪਾਪ ਆਪਣੇ ਬਸ ਨਹੀਂ ਇਹ ਲੇਖਾ ਲਿਖਤਾ ਹਾਂ ਅਸੀਂ ਪੱਕਾ ਉਹਨੂੰ ਪਾਪ ਨੂੰ ਕੋਦੇ ਉਹਨੂੰ ਪਾਪ ਸਕਦਾ ਉਹਨੂੰ ਪਾਪ ਸਭ ਜਮ ਕੀ ਅਗਲੀ ਕਹਾਣੀ ਗਈ ਉਹ ਜਿਹੜੇ ਜਾਬ ਨੇ ਪੁੱਛਣਾ ਨਾ ਉਹਨਾਂ ਪਾਪ ਉਹਨਾਂ ਨੂੰ ਪੁੱਛਿਆ ਕਿ ਕਿੱਦਾਂ ਦਾ? ਕਾਗਜ਼ੇ ਪਾੜੇ ਸਾਡੇ ਕਾਗਜ਼ੇ ਪਾੜੇਗੇ। ਨਾਂ ਨਾਂ ਦੇ ਤਰ੍ਹਾਂ ਲੇਖ ਜਿਨ੍ਹਾਂ ਨੇ ਰੋਗ ਲਿਖਿਆ ਉਹਨਾਂ ਦਾ ਲੇਖਾ ਹੀ ਪਾੜ ਦਿੰਦਾ। ਲਿਖਿਆ ਪਾੜ ਗਿਆ। ਲੇਖਾ ਪਾਟਿਆ। ਜਦੋਂ ਉਹ ਤੇ ਕੀ ਕਰੂੰਗਾ ਜਦ ਮੈਂ ਲੇਖਾ ਹੀ ਦੇਖਣਾ ਲੇਖਾ ਉਹਦੇ ਵਾਲਾ ਲੇਖਾ ਹੈ ਹੀ ਨਹੀਂ। ਠੀਕ ਹੈ ਜੀ। ਹਰ ਨਾਮ ਗੁਰਮੁਖੀ ਕਿਨੇ ਵਿਰਲੇ ਧਿਆਇਆ ਜਿੰਨ ਪ੍ਰਾਪਤ ਲਿਖਤ ਪਈ। ਅਲਕਾ ਨਾਮ ਗੁਰਮੁਖੀ ਜਨਾ ਬਿਰਦੇ ਤੇ ਆਇਆ ਕਿਸੇ ਸੁਵੇਕ ਵਾਲੇ ਦੇ ਕਿਸੇ ਗੁਰਮੁਖੀ ਦੇ ਕਿ ਹਰ ਇਹਦੇ ਜੇ ਜੋੜ ਕੇ ਰੱਖਿਆ ਆਇਆ ਤੋਂ ਧਿਆਨ ਹਟਾ ਕੇ ਨੋਬ ਕੇ ਰੱਖਿਆ ਹੈ ਰੇਤੇ ਜੇ ਰੱਖਿਆ ਸਰਬੁਖੀ ਜਿਨ ਕੋ ਪ੍ਰਾਪਤ ਨਿਕਟ ਪਈ ਉਹਨਾਂ ਦਰਗਾਹ ਜੋ ਦਰਗਾਹ ਜੋ ਗੁਜ਼ੂਰੀ ਹੋਈ ਉਹਨਾਂ ਖਾਸ ਤਸ ਪ੍ਰਮਾਨ ਹੋ ਗਿਆ ਵੀ ਫਬੀ ਆਗਮਤ ਬੇਲੇ ਭੋਲਿਆ ਸਰਕਾਰ ਸੁਣੀ ਪ੍ਰਾਰ ਤੇ ਇਹਨੂੰ ਫਰਮਾਨ ਫਰਮਾਨ ਲਿਖਤੇ ਹੁੰਦੀ ਹੈ ਜਾਂ ਫਰਮਾਨ ਜਾਰੀ ਹੁੰਦਾ ਉਹ ਲੈ ਕੇ ਪੇਸ਼ਾ ਵੀ ਬਰਸੋ ਕਿਰਪਾ ਧਾਰ ਇਹਦੇ ਤੇ ਕਿਰਪਾ ਧਾਰ ਵਰਸਾ ਦਿਓ ਇਹ ਦਸੂਗਾ ਆਹ ਥਾਰੀ ਬਾਤ ਠਾਈ ਗਈ ਹੈ ਹਾਂ ਠੀਕ ਹੈ ਜੀ ਇੱਥੇ 17ਵੀਂ ਪੌੜੀ ਸਮਾਪਤੀ